ਫਾਈ ਮਰਦਾਨਾ ਜੀ ਜਨਮ ਸਾਖੀ ਅਨੁਸਾਰ ਜਦਗੁਰੂ ਨਾਨਕ ਦੇਵ ਮਹਾਰਾਜ ਪੁਰਬ ਦੀ ਦਾਸੀ ਵਲੇ ਟਾਕੇ ਤੋਂ ਅੱਗੇ ਕਾਮਰੂਪ ਦੇ ਇਲਾਕੇ ਵਿੱਚ ਗਏ ਦੇਖਿਆ ਇੱਥੇ ਸਭ ਕੰਮ ਕਰਨ ਇਸਤਰੀਆਂ ਹੀ ਕਰਦੀਆਂ ਸਨ ਇਹ ਇਲਾਕਾ ਜੰਤਰ ਮੰਤਰ ਤੇ ਟੂਣੇ ਕਰਨ ਵਿੱਚ ਬੜਾ ਮਸ਼ਹੂਰ ਸੀ ਗੁਰੂ ਸਾਹਿਬ ਨੇ ਬਾਰ ਬਾਰ ਡੇਰਾ ਕੀਤਾ ਸੁਭਾਨ ਸਰ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਭੁੱਖ ਲੱਗੀ ਹੈ ਹੁਕਮ ਹੋਵੇ ਤਾਂ ਬਸਤੀ ਵਿੱਚੋਂ ਜਾ ਕੇ ਕੁਝ ਖਾ ਆਵਾਂ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਸੰਭਲ ਕੇ ਰਹੀਂ ਤੁਰਦਾ ਤੁਰਦਾ ਭਾਈ ਮਰਦਾਨਾ ਜੀ ਇੱਕ ਵੱਡੇ ਘਰ ਅੱਗੇ ਜਾ ਕੇ ਰੁਕ ਗਿਆ ਆਈ ਤੇ ਮਰਦਾਨੇ ਦੇ ਗਲ ਵਿੱਚ ਇੱਕ ਤਾਗਾ ਦਿੱਤਾ ਤੇ ਮਰਦਾਨੇ ਨੂੰ ਮੀਢਾ ਬਣਾ ਕੇ ਆਪਣੇ ਕੋਲ ਰੱਖ ਲਿਆ ਅੱਜ ਕੱਲ੍ਹ ਖੌਤੀ ਗਾਂਵ ਵਦੂ ਤਰਕਵਾਦੀ ਖਾਸ ਕਰਕੇ ਮਿਸ਼ਨ ਕਾਲਜ ਤੋਂ ਪੜ੍ਹੇ ਇਸ ਨੂੰ ਮੰਨ ਕਰ ਤੇ ਭਰੀਆਂ ਸਾਖੀਆਂ ਇਕਰਾਰ ਦਿੰਦੇ ਹਨ ਪਰ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਦੇ ਪਾਗ ਪਹਿਲਾ ਨੂਰਸ਼ਾ ਦਾ ਨਿਸ਼ਤਾਰਾ ਵਿੱਚ ਇੰਜ ਬਿਆਨ ਕੀਤਾ ਹੈ ਨੂਰਸ਼ਾ ਇੱਕ ਅਮੀਰ ਆਦਮੀ ਦੀ ਲੜਕੀ ਸੀ ਇੱਕ ਵਾਰੀ ਉਸਦੇ ਹੱਥ ਦੇ ਅੰਗੂਠੇ ਤੇ ਚੰਦਰਾ ਨਿਕਲ ਆਇਆ ਨੂਰਸ਼ਾ ਦੇ ਬਾਪ ਨੇ ਇਲਾਕੇ ਦੇ ਜ਼ਰਾ ਦੇਸੀ ਹਕੀਮ ਜੋ ਚੀਰਾ ਦੇ ਕੇ जख्म ਠੀਕ ਕਰਦੇ ਸਨ ਨੂੰ ਬੁਲਾਇਆ ਪਰ ਨੂਰਸ਼ਾ ਚੀਰੇ ਦੇ ਦਰਦ ਤੋਂ ਡਰਦੀ ਚੀਰਾ ਦਵਾਉਣ ਨੂੰ ਤਿਆਰ ਨਾ ਹੋਈ ਜ਼ਰਾਹ ਨੇ ਵਿਸ਼ਵਾਸ ਦਿਵਾਇਆ ਕਿ ਮੇਰੇ ਕੋਲ ਐਸੀ ਦਵਾਈ ਹੈ ਜਿਸ ਨਾਲ ਕੋਈ ਤਕਲੀਫ ਨਹੀਂ ਹੋਵੇਗੀ ਜਰਾਹ ਨੇ ਨੂਰ ਸ਼ਾਹ ਨੂੰ ਕੋਲ ਬਿਠਾਇਆ ਉਸ ਦੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਪਾਈਆਂ ਕੁਝ ਪੜਿਆ ਅਤੇ ਚੀਰਾ ਦੇਣ ਲੱਗ ਪਿਆ ਜ਼ਖਮ ਸਾਫ਼ ਕਰਕੇ ਦਵਾਈ ਲਾ ਦਿੱਤੀ ਪਰ ਨੂਰ ਸ਼ਾਹ ਨੂੰ ਕੋਈ ਤਕਲੀਫ਼ ਨਾ ਹੋਈ ਨੂਰ ਸ਼ਾਹ ਦੇ ਪਿਤਾ ਨੇ ਕਾਫੀ ਤਨ ਦੇ ਕੇ ਹਕੀਮ ਸਾਹਿਬ ਨੂੰ ਵਿਦਿਆ ਕੀਤਾ ਅਤੇ ਹਕੀਮ ਸਾਹਿਬ ਤੋਂ ਹੀ ਵਿਦਿਆ ਨੂਰ ਸ਼ਾਹ ਨੇ ਵੀ ਸਿੱਖ ਲਈ ਇਤਲਾਕੇ ਦੇ ਲੋਕਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਮਰਨ ਤੋਂ ਪਹਿਲਾਂ ਨੂਰ ਸ਼ਾਹ ਦੇ ਪਿਤਾ ਨੇ ਵਿਦਿਆ ਜਿਸ ਨੂੰ ਅੱਜ ਕਲ ਦੀ ਪਾਸ਼ਾ ਵਿੱਚ ਹਿਪਟੋਨਿਜ਼ਮ ਆਖਦੇ ਹਨ ਆਪਣੀ ਬੇਟੀ ਨੂਰ ਸ਼ਾਹ ਨੂੰ ਵੀ ਸਿਖਾ ਦਿੱਤੀ ਨੂਰ ਸ਼ਾਹ ਪਹਿਲ ਪਹਿਲੇ ਵਿਦਿਆ ਪਰਪ ਕਰ ਰਹੀ ਪਰ ਫਿਰ ਮਾਇਆ ਦੇ ਪ੍ਰਭਾਵੇ ਟਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਆਪਣੇ ਗੁਲਾਮ ਬਣਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਜਦ ਭਾਈ ਮਰਦਾਨਾ ਨੂਰ ਸ਼ਾਹ ਦੇ ਦਰ ਤੇ ਪਹੁੰਚਾ ਨੂਰ ਨੇ ਇਸ ਕਲਾ ਨਾਲ ਭਾਈ ਮਰਦਾਨਾ ਜਿਹਨੂੰ ਆਪਣੇ ਨਾਲ ਆਪਣੇ ਅਧੀਨ ਕਰ ਲਿਆ ਆਪਣੇ ਪ੍ਰਭਾਵ ਨੂੰ ਦੇਖਣ ਲਈ ਮਰਦਾਨੇ ਨੂੰ ਕਿਹਾ ਤੂੰ ਮਿੱਡਾ ਹੈ ਮਿੱਡੇ ਵਾਂਗ ਬੋਲ ਤਾਂ ਮਰਦਾਨੇ ਮਿੱਡੇ ਦੀ ਆਵਾਜ਼ ਕੱਢੀ ਜਦੋਂ کافی ਦੇ ਮਰਦਾਨਾ ਨਾ ਆਇਆ ਤਾਂ ਗੁਰੂ ਸਾਹਿਬ ਨੇ ਆਪ ਨੂਰਸ਼ਾ ਦੇ ਘਰ ਗਏ ਨੂਰਸ਼ਾ ਨੇ ਗੁਰੂ ਸਾਹਿਬ ਨੂੰ ਹਿਪਟੋਨਾਈਜ਼ ਕਰਨ ਦਾ ਪਰ ਨਾਕਾਮ ਰਹੀ ਅੰਤ ਹਾਰ ਖਾ ਕੇ ਸ਼ਰਨ ਪੈ ਗਈ ਤਰਕਸ਼ੀਲ ਤੇ ਮਿਸ਼ਨਰੀ ਕਾਲਜ ਵਾਲੇ ਕਦੇ ਨਹੀਂ ਮੰਨਣਗੇ ਪਰ ਇਹ ਗੱਲ ਤਾਂ ਦੂਰਦਰਸ਼ਨ ਤੇ ਦਿਖਾਏ ਜਾਣ ਵਾਲੇ ਸੁਰਵੀ ਪ੍ਰੋਗਰਾਮ ਵਿੱਚ ਸਹੀ ਢੰਗ ਨਾਲ ਖੁਲਾਸਾ ਕੀਤਾ ਗਿਆ ਮੁੰਬਈ ਦੇ ਇੱਕ ਜਾਦੂਗਰ ਨੇ 35 ਸਾਲਾਂ ਬੰਦੇ ਨੂੰ ਹਿਪਨੋਟਾਈਜ਼ ਕਰਕੇ ਕਿਹਾ ਤੂੰ 5-6 5 ਮਹੀਨੇ ਕੇ ਬੱਚੇ ਹੋ ਬੱਚੇ ਕੀ ਤਰ੍ਹਾਂ ਰੋ ਕੇ ਦਿਖਾਓ 35 ਸਾਲਾਂ ਬੱਚੇ ਨੇ ਬਿਲਕੁਲ ਸਹੀ ਤਰੀਕੇ ਨਾਲ 5 ਮਹੀਨੇ ਦੇ ਬੱਚੇ ਦੀ ਆਵਾਜ਼ ਵਿੱਚ ਰੋ ਕੇ ਦਿਖਾਇਆ ਫਿਰ ਉਸ ਨੇ ਬੱਚਿਆਂ ਵਾਲੇ ਫੀਡਰ ਵਿੱਚ ਦੁੱਧ ਪਾ ਕੇ ਉਸ ਨੂੰ ਕਿਹਾ ਦੁੱਧ ਪੀਓ ਅਤੇ ਉਸ 35 ਸਾਲਾਂ ਬੰਦੇ ਨੇ ਬਿਲਕੁਲ ਬੱਚਿਆਂ ਵਾਂਗ ਦੁੱਧ ਪੀਤਾ